शलोक बसंत स्वर्ग लोक है जितते पृथ्वी नवखंडन है विसरंत हर गोपाल नानक ते प्राणी उद्यान भ्रमण है जिने वे कहते दुनिया दे विच संसार के स्वर्ग मन्ने होए नेना दे ने, नौ नौ खंडा विच जिडे उथे लोग बसदे ने स्वर्ग बन के जमे कैलाश ਸੁਰਗ ਲੋਕ ਇਹਨਾਂ ਨੇ ਬਣਾਇਆ ਹੋਇਆ ਸੀ ਪਤਾਲ ਲੋਕ ਮੰਨੇ ਹੋਏ ਸੀ ਹੋਰ ਦੁਨੀਆਂ ਨੇ 8-8 ਸੁਰਗ ਬਣਾਏ ਨੇ ਕੋਈ ਕਹਿੰਦੇ ਸੁਰਗ ਕਸ਼ਮੀਰ ਹੈ ਕੋਈ ਕਹਿੰਦੇ ਕੁਤੇਆ ਕੋਈ ਕਹਿੰਦੇ ਕਿਤੇ ਆਪਣੇ ਆਪਣੇ ਬਣਾਏ ਹੋਏ ਨੇ ਮੰਨੇ ਨੇ ਲੋਕਾਂ ਨੇ ਸੁਰਗ ਉੱਥੇ ਜਿਹੜੇ ਲੋਕ ਵਸਦੇ ਨੇ ਜਿੰਨੇ ਵੀ ਸਾਰੇ ਨਵਾ ਖੰਡਾ ਵੀ ਕਿਹਾ ਇਹ ਸਾਰਿਆਂ ਨੂੰ ਹਰਿ ਗੋਪਾਲ ਹੋਇਆ ਜਿਹੜੇ ਧਰਤੀ ਦੇ ਸੁਰਗ ਮੰਨਦੇ ਨੇ ਧਰਤੀ ਜਗਾ ਸੁਰਗ ਹੁੰਦਾ ਹੀ ਨਹੀਂ ਮਿੱਡਕਾਰ ਦੁਰਦੋਂ ਨੇ ਕੋਈ ਅਮਦਾ ਕਰ। ਵਾਇਮਦਾ ਨਹੀਂ ਕਦਾ ਕਰਦਾ ਕੀ ਕਰਣ ਜੋ। ਕੋਈ ਨੂੰ ਤਾਂ ਸ਼ਰੀਰ ਸਮੇਂ ਦੇ ਨੇ। ਤੇ ਫੁਰਕ ਵੀ ਬਾਹਰੇ ਹੋਊਗਾ। ਨਾਲ ਕੇ ਪ੍ਰਾਣੀ ਉद्याਨ ਪਰ ਫਤਿਓ ਕਹਿੰਦੇ ਜੰਗਲਾਂ ਦੇ ਕੋਲ ਦੇ ਹੁੰਦੇ ਨੇ। ਉਹ ਪੁੱਲ ਦੇਖ ਲੈ, ਪਰਬਤ ਦੇਖ ਲੈ, ਉਹ ਜੰਗਲਾਂ ਦੇ ਵਿੱਚ ਫੁਰਕ ਫੁਰਕ ਹੁੰਦੇ ਨੇ ਇਹ ਸੁਰਗ ਹੈ। ਉਹਨਾਂ ਬਾਅਦ ਜੰਗਲ ਸੁਰਗੇ ਹੁੰਦੇ ਸੀ। ਉਹ ਪਸ਼ੂਏ ਹੁੰਦੇ ਨੇ, ਪਸ਼ੂ ਵੀ ਤਾਂ ਜੰਗਲ 'ਚ ਰਹਿੰਦੇ ਨੇ। ਪਸ਼ੂਆਂ ਵਰਗੀ ਬਸਤੀ ਹੁੰਦੀ ਆ ਉਹਨਾਂ ਦੀ। ਇਹ ੱੱਤੀ ਦੇ ਸਰਦ ਬੰਦੇ ਹਾਂਜੀ ਕੌਤਕ ਕੋੜ ਤਮਾਸਿਆਂ ਚਿਤਨਾ ਆਵਸ ਨਾਉ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਉ ਜੇ ਕੋਈ ਆ ਜਾ ਹੋਵੇ ਚਲੋ ਰਾਜ ਮਹਿਲ ਤੇ ਰਹਿੰਦਾ ਹੋਵੇ بڑا ਸ਼ਹਿਰ ਵੀ ਹੋਵੇ ਦਾ ਬਸਾਇਆ ਹੋਇਆ ਉੱਤੇ ਕੌਤਕ ਰੋਜ ਕੋਤ ਕੋਈ ਨਾ ਕੋਈ ਰੋਜ਼ ਹਨੇਰਾ ਤਮਾਸ਼ਾ ਦੇਖਦਾ ਹੋਵੇ ਕੋਤਕ ਦੇਖਣਾ ਹੋਵੇ ਕਿੰਨਾ ਆਪ ਸਨੋਂ ਨਾਮ ਦੀ ਕੋਈ ਗੱਲ ਨਾ ਉੱਥੇ ਹੁੰਦੀ ਹੋਵੇ ਗਿਆਨ ਦੀ ਕੋਈ ਗੱਲ ਨਾ ਹੁੰਦੀ ਹੋਵੇ ਉੱਥੇ ਆਤਮ ਗਿਆਨ ਦੀ ਕੋਈ ਕਥਾ ਵਿਚਾਰ ਨਾ ਹੁੰਦੀ ਹੋਵੇ ਗਿਆਨ ਵਿਚਾਰ ਨਾ ਹੁੰਦੀ ਹੋਵੇ ਉੱਥੇ ਕੋਤਕ ਤਮਾਸ਼ੇ ਹੀ ਲੱਗੇ ਹੁਣ ਨਾਨਕ ਕੋੜੀ ਨਾਲ ਕੋਰੋਨਾ ਨਰਕਾਂ ਬਰਾਬਰ ਹੈ ਉਹ ਜਗ੍ਹਾ ਇਤਨਾ ਕਿ ਨਹੀਂ ਕੋਰੋਨਾ ਨਰਕਾਂ ਬਰਾਬਰ ਹੈ ਉਹ ਜਗ੍ਹਾ ਉੱਜੜ ਸੋਈ ਤੋਂ ਉਹ ਜਿਹੜੇ ਪਾਗਲ ਭਗਤਾਂ ਦੇ ਆ ਗੱਲ ਕੋੜੀ ਦਾ ਅਰਥ ਕਰਕੇ ਆ ਜਿਹਦਾ ਅਜੇ ਸਾਈ ਤਾਂ ਤਮਾਸ਼ਾ ਹੀ ਨਹੀਂ ਅੱਛਾ ਉਹ ਕੱਦਾ ਹੁੰਦਾ ਤਾਂ ਵੀ ਕਰੋੜਾਂ ਦੇ ਬਰਾਬਰ ਕਰਤਾ ਉਹ ਲੇਖਿਆ ਤਾਂ ਹੈ ਆਪਾਂ ਦਾ ਅਰਥ ਹੀ ਕਰਦੇ ਇਹਦਾ ਅਰਥ ਕੋੜੀ ਤਾਂ ਨਹੀਂ ਹੈ ਕੋੜੀ ਦਾ ਮਤਲਬ 1 ਕਰੋੜ ਕਰੋੜਾਂ ਹੈ ਜੀ ਆ ਕਰੋੜਾਂ ਨਾਲ ਕਾ ਬਰਾਬਰ ਠੀਕ ਜੀ ਜਿੱਥੇ ਨੌ ਹੈ ਉੱਥੇ ਸਵਰਗ ਹੈ ਯਾ ਬੱਸ ਬੱਸ ਜਿੱਥੇ ਨੌ ਨਹੀਂ ਹੁੰਦੇ ਸਾਡੇ ਨਗਰ ਝੂਠ ਸਮਗਰੀ ਪੇਖ ਸੱਚ ਕਰ ਜਾਣੇ ਵਾਹ ਭਿਆਨ ਉद्याਨ ਨਜ਼ਰ ਕਰ ਮਮਿਆ ਮਹਾਪੇ ਆਨੋ ਧਿਆਨ ਮਹਾਪੇ ਆਨ ਕੋ ਧਿਆਨ ਨੂੰ ਬੱਗਰ ਕਰਕੇ ਮੰਨਿਆ ਕਿ ਕਰਕੇ ਮੰਨ ਲਿਆ ਬਲਕੇ ਸਦਨ ਕਰ ਸਮਝੋ ਮਰੀ ਸੱਚ ਕਰ ਜਾਣਿਆ ਇਹਨੇ ਜੰਗਲ ਚ ਨੇ ਜਿਵੇਂ ਸ਼ਿਵਜੀ ਬੋਲ ਰਹੇ ਨੇ ਉਹ ਉਸ ਨੂੰ ਸ਼ਹਿਰ ਮੰਨਦਾ ਉਹ ਕੋਈ ਲੱਗਦਾ ਉਹਦਾ ਇਹ ਮੇਰਾ ਖਿਆਲ ਰਹੀ ਹੈ ਇਹਦਾ ਇੱਥੇ ਹੀ ਹੈ ਤੂੜ ਜ਼ਮਗਲੀ ਪੇ ਸੱਚ ਕਰ ਜਾਣਿਆ ਉਹਨਾਂ ਦੇ ਊਠ ਨੂੰ ਸੱਚ ਬਣ ਲਿਆ ਉਹਨਾਂ ਨੇ ਉਹ ਵੀ ਝੂਠੇ ਇਹ ਜ਼ਾਇਰ ਜੂਰੇ ਵਹਾਂ ਸੁਧਿਆਨ ਵੀ ਝੂਰੇ ਇੱਕੋ ਜਿਹਾ ਉੱਥੇ ਵੀ ਆਇਆ ਉੱਥੇ ਵੀ ਆਇਆ ਤੁਹ ਜਿਹੜਾ ਆਇਆ ਹੀ ਹੈ ਨਾ ਠੀਕ ਹੈ ਜੀ ਮਾਇਰੀ ਸਮਗਰੀ ਚ ਜਦ ਤੱਕ ਫਸਿਆ ਹੋਇਆ ਜਦ ਝੂਠ ਚ ਫਸਿਆ ਹੈ ਜੀ ਸਾਚ ਬੈਠਾ ਹੋਰ ਵੀ ਮੇਰੇ ਕੋ ਬੈਠਾ ਹਾਂਜੀ ਭਗਤ ਰਵਿਦਾਸ ਜੀ ਵੀ ਤਾਂ ਕਹਿੰਦੇ ਇਹ ਜੀਵਨ ਜਾਗ ਸੱਚ ਕਰ ਜਾਨਣਾ ਹਾਂਜੀ ਹਾਂਜੀ ਠੀਕ ਹੈ ਜੀ ਕਾਮ ਕ੍ਰੋਧ ਅਹੰਕਾਰ ਫਿਰੇ ਦਿਵਾਨਿਆਂ ਫਿਰ ਲੱਗਾ ਜਮ ਡੰਡ ਤਾਂ ਪਛੋ ਤਾਨੇ ਫਿਰਦਾ ਫਿਰ ਲੱਗਾ ਜਮ ਡੰਡ ਤਾਂ ਪਛੋ ਤਾਨੇ ਜਾਂ ਜਮ ਦਾ ਡੰਡਾ ਲੱਗਦਾ ਹੈ ਨਾ ਜਾਂ ਜਾਗਦਾ ਫਿਰ ਪਛਾਉਂਦਾ ਹੈ ਫਿਰ ਆ ਹੈ ਫਿਰ ਪਤਾ ਲੱਗਦਾ ਕਿ ਤਾਂ ਗੱਲ ਸੀ ਫਿਰ ਨਾਲ ਨਸ਼ਾ ਉੱਤਰ ਜਾਂਦਾ ਪਰ ਇਹ ਜਿਹੜਾ ਸਿਰ ਲੱਗਾ ਜਮਦੰਡ ਤਾਂ ਜਾ ਕੇ ਜੰਗਾ ਡੰਡ ਜਾ। ਜਦ ਆ ਜਾਂਦੇ ਨੇ ਕਹਿੰਦੇ ਫਰਮਾਨ ਆ ਜਾਂਦਾ ਫਿਰ ਕੁਝ ਤਾਂ ਹੁੰਦਾ। ਕਿ ਪਛਤੋਂਦਾ ਝੂਠ ਤੇ ਇੱਕ ਅਗਿਆਨਤਾ ਤੇ ਇਹ ਕਹੈਦੇ ਪਛਤੋਂਦਾ। ਆਪਣੀ ਗਲਤੀ ਤੇ ਪਛਤਾਉਣਾ ਹਾਂਜੀ ਸਿਰ ਲੱਗਾ ਜਮਦੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨੀ। ਪੂਰੇ ਗੁਰਦੇਵ ਤੇ ਬਨਾਲ ਪੂਰਾ ਗਿਆਨ ਦੇਣ ਵਾਲਾ ਜੇ ਨਹੀਂ ਮੜਿਆ ਕੈਤਾਨ ਹੋਰ ਗੱਲਾਂ ਕਹੇਤਾਂਨ ਬਾਕੀ ਕਿੰਨੀ ਹੋਰ ਬਤਾਨੂ ਕਿਸੇ ਕੈਤਾਨ ਦਾ ਪਾਇਆ ਹੋਇਆ ਹੁੰਦਾ ਹਾਂਜੀ ਠੀਕ ਹੈ ਇਹ ਪੂਰੇ ਗੁਰਦੇਵ ਦਾ ਕੀ ਇਹੇ ਕੋਲ ਪੂਰਾ ਗਿਆਨ ਹੈ ਨਾ ਉਹ ਪੂਰਾ ਗੁਰਦੇਵ ਹੁੰਦਾ ਜਿਵੇਂ ਗੁਰਬਾਣੀ ਆਲੇ ਤੇ ਬ੍ਰਹਮ ਨਿਕਟ ਕਰ ਤੇ ਨਾਲ ਹੈ ਤੇ ਉਹ ਅੰਦਰ ਕਹਿੰਦੇ ਨਹੀਂ ਬਾਹਰੋਂ ਕਹਿੰਦੇ ਨੇ ਹਾਂ ਉਹ ਸ਼ੈਤਾਨ ਨੇ ਗੁਰ ਤੇ ਗੁਰਦੇਵ ਕਿ ਅੱਖਰ ਹੈ ਜੀ ਫਿਰ ਗੁਰ ਗਿਆਨ ਆ ਨਾ ਗਿਆਨ ਦੇਣ ਵਾਲਾ ਗੁਰਦੇਵ ਅੱਛਾ ਜੀ ਕੋਈ ਕਹਿ ਦਿੰਦਾ ਨਾ ਸਤਗੁਰ ਵੀ ਕਹਿ ਦਿੰਦਾ ਨੇ ਗੁਰਦੇਵ ਨੂੰ ਗੁਰਦੇਵ ਕਹਤਾ ਗਿਆਨ ਦੇਣ ਵਾਲਾ ਪੂਰਾ ਗੁਰਦੇਵ ਜਿਹੜਾ ਹੈ ਨਾ ਪੂਰਾ ਗੁਰ ਵੀ ਹੁੰਦਾ ਹੈ ਪੂਰਾ ਗੁਰ ਵੀ ਕਹਿੰਦਾ ਗੁਰਦੇਵ ਵੀ ਕਹਿੰਦਾ ਪਰ ਇਹ ਚੇਤਨੇ ਹੋਏਗਾ ਨਹੀਂ ਜਿਵੇਂ ਗੁਰ ਤਾਂ ਜੜ ਵੀ ਹੋ ਸਕਦਾ ਹੈ ਨਾ ਗੁਰ ਤਾਂ ਜਿਵੇਂ ਹੁਣ ਗਿਆਨ ਲਿਖਿਆ ਹੋਇਆ ਗ੍ਰੰਥ ਵਿੱਚ ਉਹ ਤਾਂ ਜੜ ਹੈ ਪਰ ਉਹ ਗੁਰਦੇਵ ਉਸ ਫਰਕ ਹੁੰਦਾ ਗੁਰ ਜਿਹੜਾ ਗਿਆਨ ਉਹ ਨੂੰ ਕੋਲ ਹੁੰਦਾ ਨਾ ਪਰ ਇੱਕ ਬਚਨ ਪੁਰਖਵਾਚ ਹੋ ਜਾਂਦਾ ਰਾਦਰ ਨੂੰ ਕਹਾਲਾਣਾ ਗੁਰਦੇ ਨੂੰ ਔਂਕੜ ਰਾਦਰ ਨੂੰ ਔਂਕੜ ਫਿਰ ਉਹ ਖਬਾ ਚ ਇੱਕ ਵਜਨ ਹੋ ਜਾਂਦਾ ਠੀਕ ਹੈ ਪਰ ਹੋਤਾ ਜੇ ਕੋਈ ਅੱਖਰ ਆ ਜਾਵੇ ਫਿਰ ਉਹ ਔਂਕੜ ਲੈ ਜਾਂਦਾ ਗੁਰਦੇਵ ਲੱਗਿਆ ਨਾਲ ਫਿਰ ਉਹ ਔਂਕੜ ਖਤਿਆ ਜਾਂਦਾ ਹਾਂ ਪਤਾ ਲੱਗਦਾ ਨਾ ਫਰੂਈ ਚੇਤਨਾ ਕਿ ਕਿ ਅਭੀ ਜਦੋਂ ਤੱਕ ਪੂਰੇ ਗੁਰਦੇਵ ਤੋਂ ਗਿਆਨ ਨਾ ਮਿਲੇ ਜਦੋਂ ਤੱਕ ਮਨ ਜਿਹੜਾ ਹੈ ਸ਼ੈਤਾਨ ਦੇ ਰੂਪ ਚੇ ਫਿਰਦਾ ਰਹਿੰਦਾ ਹੈ ਗੁਰਦੇਵ ਤਾਂ ਉਹ ਵੀ ਆਪਣੇ ਆਪ ਨੂੰ ਕਹਿੰਦੇ ਨੇ ਹਾਂ ਜਿਹੜੇ ਦੰਦੇ ਨੇ ਸਾਰੀ ਗੁਰਦੇਵ ਨੇ ਉਹ ਤਾਂ ਬਲਕਿ ਗੁਰੂ ਬਣੇ ਹੋਏ ਨੇ ਗੁਰਦੇਵ ਤਾਂ ਕੁੱਤੇ ਨੇ ਵਿਚਾਰੇ ਉਹ ਤਾਂ ਇਦੋਂ ਵੀ ਗਾਂ ਬਣੇ ਹੋਏ ਠੀਕ ਹੈ ਪਰ ਉਹ ਗੁਰੂ ਅੰਤੇ ਨਹੀਂ ਗੁੱਟੇ ਦਾ ਕੇਂਦਲੇ ਉਹਨਾਂ ਨੂੰ ਅੰਤ ਬਣਿਆ ਹੋਇਆ ਗੁਰਦੇਵ ਨਾਲ ਨਹੀਂ ਤਾਂ ਲੱਗਿਆ ਹੋਇਆ ਲਫਜ਼ ਕਿਤੇ ਵੀ ਗੁਰਦੇਵ ਨਹੀਂ ਅਗਲਾ ਹੁੰਦਾ ਗੁਰਦੇਵ ਛੋਟਾ ਹੈ ਨਾ ਜਿਹੜਾ ਆਪਣੇ ਆਪ ਨੂੰ ਸਭ ਤੋਂ ਵੱਡਾ ਮੰਨਦਾ ਉਹ ਜਾਂਦਾ ਹੁੰਦਾ ਆਪਣੇ ਕੋਲ ਜੋ ਜਾਣੇ ਉੱਚਾ ਸੋਈ ਗੜੀਏ ਸਭ ਤੋਂ ਨੀਚਾ ਠੀਕ ਹੈ ਜੀ ਇੱਥੇ ਨੌਵੇਂ ਪੌੜੀ ਦੀ ਸਮਾਪਤੀ ਹੈ ਜੀ